ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗਮੂਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਇ ਕਰਤਾ ਜਗਮੂਆ ਜਗ ਮਰ ਗਿਆ ਆਸਾ ਕਰਦਾ ਕਰਦਾ ਹੀ ਆ ਬੜੂ ਆਸਾ ਮਰੇ ਨਾ ਜਾਏ ਆਸਾ ਹੀ ਹੋਰ ਜਿਵੇਂ ਨਾ ਫੇਰ ਦੀ ਕਿਤੇ ਜੁਥੇ ਤੇ ਜਦੋਂ ਉਹ ਜਾਨਾਂ ਕੱਟਿਆ ਜਾਂਦਾ ਆਸਾਂ ਰੂੜੀ ਬਾੜਿਆ ਆਸਾਂ ਦੇਤੋਂ ਆਪ ਮਰ ਗਿਆ ਇੱਜਾ ਕਮਜ਼ੋਰ ਆਦਮੀ ਆਪਣੇ ਇੱਛਾ ਦੇਤੋਂ ਆਪ ਮਰ ਗਿਆ ਆਪਣੀ ਇੱਛਾ ਰੂੜੀ ਬਾੜ ਸਕਿਆ ਗੁਰਮੁਖਵੰਤ ਜਾਣ ਦਹਾਈ ਜੇ ਆਪਣੀ ਆਸਾਂ ਮਾਰ ਲੈਂਦਾ ਹੁੰਦਾ ਕੱਟਿਆ ਜਾਂਦਾ ਤੇ ਜਾਨਾਂ ਨਹੀਂ ਕਿਤੇ ਸੀ ਸ਼ਬਦ ਵਿੱਚ ਸਮਾ ਜਾਂਦਾ ਸਰਬ੍ਰੱਪੀ ਹੋ ਜਾਂਦਾ ਸਰਬ੍ਰੱਪੀ ਨਹੀਂ ਜਾਣਾ ਕਿੱਥੇ ਉਹ ਕਿੱਥੇ ਜਾਂਦਾ ਉਹਦਾ ਜਦ ਤੱਕ ਉਹ ਗਹਿਰਾ ਹਜਰ ਹੋ ਗਏ ਕਿੱਥੋਂ ਦੀ ਗਏ ਉਹ ਤੋਂ ਗਹਿਰਾਜ ਰਹਣਾ ਸਰਬ੍ਰੱਪੀ ਤਾਂ ਹੈ ਨਹੀਂ ਕਿੱਥੇ ਹੋਜੀ ਕੀ ਕਹੇ ਜੀ ਆਸਾ ਕਰਤਾ ਜਗ ਮੁਆ ਜਗ ਤੋਂ ਭਾਵ ਕੀ ਲਵਾਂਗੇ ਵੀ ਇਕਲਾ ਸਰੀਰ ਸਰੀਰ ਕਰਕੇ ਜਦੋਂ ਹਮਾਇਆ ਲੈ ਕੇ ਜਦੋਂ ਦੀ ਨਾਲੇ ਸੋ ਜਾ ਜਗ ਆਇਆ ਸਰ ਕਾਹ ਕੋ ਕਹਿ ਲੋ ਚਾਹ ਵਗ ਕਹਿ ਲੋ ਇਹਨੂੰ ਕੋਈ ਗੱਲ ਹੈ ਠੀਕ ਹੈ ਤੇ ਜਥੇ ਹੀ ਕਹਿਣ ਦਾ ਭਾਵ ਆਸਾ ਮਰੇ ਜਾ ਸਕਦਾ ਹੈ ਬਿਲਕੁਲ ਨਹੀਂ ਜਾ ਸਕਦਾ ਠੀਕ ਹੈ ਜੀ ਨਾਨਕ ਆਸਾ ਪੂਰੀਆਂ ਸੱਚੇ ਸਿਓ ਚਿਤ ਲਾਏ ਆਸਾ ਪੂਰੀਆਂ ਸੱਚੇ ਸਿਓ ਚਿਤ ਲਾਏ ਜਿਹਨਾਂ ਨੇ ਨਾਲ ਚਿਤ ਲਾ ਲਿਆ ਸਾ ਪੂਰੀਆਂ ਆਪਣੇ ਅੰਦਰ ਹੋ ਗਏ ਸੱਚਖੰਡ ਦੀ ਐਂਟਰੀ ਮਿਲ ਗਈ ਆ ਨਾ ਇਹਨੂੰ ਸੱਚਾ ਸੱਚਾ ਕਿੱਥਲਾ ਲਿਆ ਠੀਕ ਹੈ ਜੀ ਆਸਾ ਮਾਰੀ ਮੇ ਤਾਂ ਸੱਚੇ ਨਾਲ ਕਿੱਥ ਲੱਗਦਾ ਦੀ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿੰਨ ਕੀਤੀ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬਾਜੋ ਹਰ ਕੇ ਨਾਹੀ ਤੇ ਕਹਿੰਦੇ ਆਸਾ ਨੂੰ ਦੀ ਵੀ ਮਰ ਜਾਣੀ ਹੈ ਇਹ ਵਾਲੀ ਨਹੀਂ ਹੈ ਅੱਛਾ ਜੀ ਅੱਜ ਦੀ ਗੱਲ ਗੱਲ ਨੂੰ ਕਰਸੂ ਬੰਦੀ ਜਿੰਕੀਤੀ ਸੇ ਲੈ ਜਾਏ ਅਸਲ ਜੇ ਮਲਦੀ ਦੀ ਜਿੰਨੇ ਪੈਦਾ ਕੀਤੀ ਉਹ ਹੀ ਲੈ ਜਾਂਦਾ ਇਹਨੂੰ ਇਥੋਂ। ਕਿਆ ਸਮਾਚਾ ਪੂਰਾ ਹੁੰਦਾ ਆਪਣੀ ਗੁਦਾਰੀ ਜੇ ਬਾਜੀਗਰ ਸੰਗ ਖੇਲਦਾ ਨਾ ਆਸਾਂ ਨੂੰ ਸੱਟ ਈ ਕਰਕੇ ਨਾ ਫੇਰ ਥੈਲੀ ਚ ਪਾ ਲੈਂਦਾ ਆਪਣੀ। ਨਾਨਕ ਦੇਚਲ ਕੋ ਵਾਜੋਂ ਹਰਕੇ ਨਾਲਿ ਵਾਜੋਂ ਹਰਕੇ ਨਾਲਿ ਚਾਰਜ ਦਾ ਹਰਕੇ ਵਾਲੀ ਅੱਛਾ ਕੀਤੀ ਉਹ ਲੈ ਜਾਂਦਾ ਜਿਹਨੇ ਪੈਦਾ ਕੀਤੀ ਛੱਡ ਕੇ ਜਾਂਦਾ ਨਾਲ ਪਾਣੀ ਪਾ ਕੇ ਜਾਂਦਾ ਵੀ ਹੋਰ ਨਾ ਕਹਿਤਾ ਅੱਗ ਲੱਗ ਜਾਏ ਘਰ ਬੁਝਾ ਕੇ ਜਾਂਦਾ ਆਪੇ ਜਗਤ ਪਾਇਨ ਕਰ ਪੂਰਾ ਥਾਟ ਆਪੇ ਸ਼ਾ ਆਪੇ ਬਨਜਾਰਾ ਆਪੇ ਹੀ ਹਰ ਹਾਟ ਜਿੱਦਿ ਪੂਰੀ ठाਠ ਵਾੜ ਕਰਕੇ ਕਿੱਦਾਂ ਜਗਤ ਪਾਇਆ ਫਿਰ ਰਾਜੇ ਹੀਰੇ ਮੋਤੀ ਕੀ ਬਣਾਇਆ ਇਤਨੀ ਵਧੀਆ ਵਧੀਆ ਚੀਜ਼ਾਂ ਬਾਗ ਬਿਲਖ ठाਠ ਵਾੜ ਨਾਲ ਬਣਾਇਆ ਪੂਰਾ ਸੰਸਾਰ ਲੜਦੇ ਰਹਿਣ ਇੱਕੋ ਜਆ ਲੜਨਾ ਕਿਸੇ ਨੇ ਨਹੀਂ ਵੇੜਾਈ ਤੋਂ ਸਾਤਰ ਬਣਾਇਆ ਸਾਡੇ ਆਪੇ ਸਾਉ ਆਪੇ ਬਣ ਜਾਦਾ ਸਾ ਵੀ ਆਪੇ ਬਣ ਜਾਦਾ ਵੀ ਆਪੇ ਸੰਸਾਰ ਕਿ ਆਇਆ ਠੀਕ ਹੈ ਜੀ ਸਾ ਬਣ ਕੇ ਜਿੱਤ ਸਾਹਿਬ ਬਣ ਜਾਦਾ ਬੁੱਧ ਅੱਛਾ ਮਨ ਸੌਦਾ ਹੈ ਸਾ ਵੀ ਆਪੇ ਬਣ ਜਾਦਾ ਮਨ ਕਰਕੇ ਬਣ ਜਾ ਰਹਾ ਅੱਛਾ ਆਪੇ ਹੀ ਹਰ ਹਾਰ ਹਾਟ ਜਿੱਤੇ ਹਾਰਿਆ ਨਾ ਫਰ ਆਪੇ ਹਾਟ ਹੈ ਅਲਟੀਪਾ ਬਣੇ ਤੇਜ ਬੇਕਾ ਤੇਜ ਬੇਕਾ ਉਸੇ ਨਾਲ ਤੋਲਦਾ ਸਹੀ ਤੋਲਦਾ ਉਹ ਅੱਜ ਝੋੜ ਦੀ ਪਛਾਣ ਕਰਾ ਦਿੰਦਾ ਉਹ ਉਹ ਗਿਆਨ ਬਾਹਰੋਂ ਖਰੇ ਨੂੰ ਕਹਾਂ ਲੈ ਲੈ ਹਾਟ ਦਾ ਭਾਵ ਤੱਕੜੀ ਹੈ ਦਾ ਭਾਵ ਜਿਹੜੀ ਅੰਦਰ ਸਟੋਰ ਹੈ ਹੈ ਦੁਕਾਨ ਅੱਛਾ ਜੀ ਇਹ ਕੋ ਹਾਰਟ ਦੀਆ ਆ ਆ ਕੇ ਤਲਵਾਉਣਾ ਸੀ ਹਾਰਟ ਦੇ ਰਾਜੋ ਫੈਸਲਾ ਹੀ ਕਰਾਉਣਾ ਸੀਗਾ ਸੱਚ ਝੂਠ ਖਰੀਦਣ ਕੀ ਆਇਆ ਜਾਂਦਾ ਨਹੀਂ ਅੰਦਰ ਮੈਨੂੰ ਆ ਦੇ ਦੇ ਮੈਨੂੰ ਉਹ ਦੇ ਦੇ ਬਾਹਰ ਪੌੜੀਆਂ ਪੜਦਾ ਕੋਈ ਪੌੜੀਆਂ ਤੇ ਬੈਠ ਕੇ ਕੋਈ ਕੋਈ ਪੜਦਾ ਕੋਈ ਕੋਈ ਪੜਦਾ ਹਰ ਕੋਲ ਹਾਰਟ ਕੋਲ ਗੋਦ ਲੈ ਜਾ ਕੇ ਸੁਖਬੀ ਸਾਹਿਬ ਦਾ ਪਾਠ ਕਰਦਾ ਦੁਕਾਨਦਾਰ ਚੇਤਨ ਦਾ ਗਿਆਨ ਲਊਗਾ ਕਿ ਨਹੀਂ ਚੇਤਨ ਦਾ ਗਿਆਨ ਹੋਊਗਾ ਬੱਬੂ ਕਾ ਹੈ ਘਰ ਦਾ ਤੇਰੇ ਸਭ ਕੁਝ ਹੈ ਆਪੇ ਹੀ ਆ ਰਾਹ ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵੜ ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵੜੇ ਖੇਵੜ ਫਰਕਲਨ ਵਾਲਾ ਖੇਵੜ ਚਲਾਉਣ ਵਾਲਾ ਡਰਾਈਵਰ ਜਹਾਜ਼ ਚਲਾਉਣ ਵਾਲਾ ਵੀ ਆਪੇ ਆੁੰਦਰ ਵੀ ਆਪੇ ਸਭ ਕੁਝ ਆਪੇ ਹੈ ਹੈ ਅੱਛਾ ਜੀ ਆਪ ਤੋਂ ਬਾਗ ਜੀ ਬਸ ਕਟਾਈਏ ਦੀ ਹੈ ਜੀ ਬਸ ਮਨੀ ਬੇ ਜਲਦੀ ਪਤਾ ਹੀ ਜੀ ਬਾਤ ਮਾਦੀ ਆਦਮ ਕਥਾ ਹੈ ਪਰ ਕਿਹੜਾ ਆਪ ਹੈ ਨੇ ਏਕਾ ਕਰਨਣ ਦੇ ਨੇ ਤੀਆ ਕਿਹੜਾ ਵਰਬੁੱਧੀ ਚਤ ਅੱਛਾ ਆਨੰਦ ਬੂਲ ਪਰਮ ਬਦ ਪਾਵਾ ਜਿੱਦ ਨੂੰ ਤੀਨੇ ਇਕੱਠੇ ਕਰ ਲੈ ਰਹੇ ਜਗਾ आनंद मूल परम्पत्ति प्राप्ति हुई प्रेमड़ी माया कितने रे ठीक है ने ने ने ने। जी आप पे गुरु चेला है आप पे आप पे दसवे घाट देखो आप पे गुरु चेला है आप पे के गोरा पे चेला भी आप पे उस गोरे वार के चले गया चेला भी आप पे गुरु भी आप पे जित ਦੋ ਆਉਂਦੀ ਗੁਰਬਾਨੀ ਦਾ ਗਿਆਨ ਲੈ ਕੇ ਤਉਹਾਨੂੰ ਛੋੜ ਦੇ ਹੈ ਜੇ ਤਾਂ ਸੁੱਚੀ ਹੈ ਕਾਹਦਾ ਜੋੜੂ ਵੀ ਨਹੀਂ ਫੇ ਕੁੱਤੀ ਦਾ ਹੈ ਉਹ ਲਾਪੇ ਦਸਤੇ ਘਾਟ ਜੇ ਨਾਨਕ ਨਾਮ ਤੇ ਆਏ ਤੂੰ ਸਭ ਕਿਲਵਿਖ ਘਾਟ ਜੇ ਅਨਾਰਤ ਨਾਮ ਤੇ ਆਏ ਉਹ ਖਬ ਕਿਲਵਿਖ ਘਾਟ ਜੇ ਆਨੰਦ ਦਾ ਨਾਮ ਧਿਆਨ ਕਰ ਜਿਹੜਾ ਸਭ ਸੱਬ ਕਿਲ ਕਾਟ ਕਰਨ ਵਾਲਾ ਹੈ ਸੱਬ ਕਿਲ ਵਿਖਾ ਕਟਣ ਵਾਲਾ ਉਹ ਸੁਭਾਉ ਦਾ ਧਿਆਨ ਕਰ ਉਹ ਜਨਾਂ ਨੂੰ ਕਿਲ ਬਕਟੇ ਜਾਂਦੇ ਸੀ ਠੀਕ ਹੈ ਜੀ ਇਹ ਹੁਣ ਨਾਮ ਧਿਆਏ ਤੂੰ ਕਿਹੜਾ ਪਦਾਰਥ ਹੈ ਕਿ ਨਾਮ ਪਦਾਰਥ ਹੈ ਜਪਣਾ ਹੁੰਦਾ ਹਾ ਤਾਂ ਗਿਆਨ ਦੋਦਾ ਗਿਆਨ ਪਦਾਰਥ ਜਪਣਾ ਹੈ ਤੇ ਨਾਮ ਪਦਾਰਥ ਧਿਆਉਣਾ ਹੈ ਤੇ ਆਵਣਾ ਧਿਆਉਣ ਦੀ ਕਹਾ ਹਰ ਰੋਗ ਤੇ ਆਵਣ ਇੱਕ ਗਿਆਨ ਉੱਤੇ ਸਿੱਧਾ ਨਾਮ ਹੁੰਦਾ ਹੂੰ ਹੂੰ ਨਾਮ ਮੱਖੜਾ ਹੁੰਦਾ ਸਮਝਣ 'ਚ ਫਰਕ ਰਹਿ ਜਾਂਦਾ ਹੈ ਆਪਣੀ 'ਚ ਸ਼ਬਦ ਭੇਦ ਸ਼ਬਦ ਨਾਮ ਆ ਕੇ ਕੱਢਦਾ ਹੈ ਜਿਹੜਾ ਸ਼ਬਦ ਭੇਦ ਸਮਝਣ 'ਚ ਰਹਿ ਜਾਂਦਾ ਨਾਮ ਤੋਂ ਬਿਨਾਂ ਨਿਕਲਦਾ ਨਹੀਂ ਸ਼ਬਦ ਵੇਦ ਕੇ ਵਿੱਚ ਕਹੂਗਾ। ਆਪ ਗੱਡੂ ਆ। ਉਹ ਖੜਾ ਹੈ। ਤੇ ਲੱਸੀ ਵੀ ਹੈ। ਬਿਲਕੁਲ ਲੱਸੀ ਦੀ ਖਟਿਆਸੀ ਅੰਸਾਰ ਹੈ। ਜਿੱਦਾਂ ਜੇ ਨਾਮ ਪ੍ਰਗਟ ਨਹੀਂ ਹੁੰਦਾ ਉਹਾਂ ਲੱਸੀ ਵੀ ਅੰਸਨਾ ਨੇ ਕਈ ਲੱਸੀ ਬਹੁਤ ਘੱਟ ਬਣਾਉਂਦੇ ਨੇ। ਕੋਸ਼ਿਸ਼ ਕਰਦੇ ਨੇ। ਕਈਆਂ ਦੇ ਖਟਾਸ ਰਹਿੰਦੀ ਹੈ। ਕੋਸ਼ਿਸ਼ ਕਰਦੇ ਨੇ। ਪਰ ਜਨਾ ਪਰ ਗਟੋਂ ਦਾ ਸੜਾ ਸਿੱਧੀ ਜਿਹੀ ਠੀਕ ਹੈ ਜੀ ਹਾਂ